ਬਿਲਾਵਲ ਮਹੱਲਾ ਪਹਿਲਾ ਚਿੱਤੀ ਕਰ ਦਸਵਾਂ ਜੱਤ ਇੱਕ ਓੰਕਾਰ ਸਤਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਿਤ ਖੋਜਿਤ ਘਟ ਘਟ ਦੇਖਿਆ ਕਿੱਤਾ ਦੇ ਪ੍ਰਥਾਏ ਗੱਲ ਹੈ ਕਿਤੀ ਕਿੱਤਾ ਨੇ ਜਿਵੇਂ ਇੱਕਮ ਧੂਜ ਤੀਜ ਤਲਵੇ ਕੇਂਦਰ ਵਾਂ ਦੇ ਹਿਸਾਬ ਨਾਲ ਹੁੰਦੀ ਉਹਨੇ ਕਿਤਾ 15 اچھا ਜੀ 93 ਮਹੀਨਾ ਹੁੰਦਾ ਹੈ ਤੇ ਕਈ ਵਾਰ ਘਟਵਾ ਜਾਂਦੀ ਇਥੇ ਸੂਰਜ ਦਾ ਜਿਹੜਾ ਦੂਆਸਾਰ ਅਲੱਗ ਹੁੰਦਾ 300 ਪੈਗ ਦਿੰਦਾ ਹੁੰਦਾ ਕਿੱਤੇ ਸ਼ੁਰੂ ਹੋਈ ਹੈ ਵੈਸੇ ਕਬੀਰ ਨੇ ਵਿਤ ਕਿੱਤੀ ਗੌੜੀ ਲਿਖਿਆ ਨੇ ਉਹਨਾਂ ਨੇ ਮੱਥਿਆ ਤੋਂ ਸ਼ੁਰੂ ਕੀਤੀ ਹੈ। ਅਮਾਵਸ ਮੱਥਿਆ ਤੋਂ ਸ਼ੁਰੂ ਕੀਤੀ ਸੀ। ਉਹ ਅਗਿਆਨਤਾ ਤੋਂ ਸ਼ੁਰੂ ਕਰਕੇ ਉਹ ਗਿਆਨ ਵੱਲ ਨੂੰ ਜਾ ਰਹੇ ਨੇ। ਇਹਨਾਂ ਨੇ ਇੱਕੋ ਤੋਂ ਸ਼ੁਰੂ ਕੀਤੀ ਹੈ। ਇੱਕੋ ਤੋਂ ਸ਼ੁਰੂ ਤਾਂ ਅਗਿਆਨਤਾ ਤੋਂ ਗਿਆਨ ਆਇਆ। ਇਹ ਤਾਂ ਅਗਿਆਨਤਾ ਵਿੱਚ ਸੀ। ਗਿਆਨ ਥਾਈ ਉਹ ਅਗਿਆਨਤਾ ਤੋਂ ਗਿਆਨ ਆਪ ਆਇਆ ਸੀ ਆਪਣੀ ਖੋਜ ਨਾਲ। ਇਹਨਾਂ ਨੂੰ ਰੈਡੀਵੇਟ ਖੋਜ ਮਿਲੀ ਹੋਈ ਹੈ। ਉਸ ਗੁਰਬਾਣੀ ਦੀ ਸੀ ਗੁਰਬਾਣੀ ਦੀ ਇਹ ਕਰਕੇ ਇਹਨਾਂ ਨੇ ਇੱਕ ਮਿੰਟੋਂ ਸ਼ੁਰੂ ਕੀਤੀ ਗੱਲ ਇਹ ਵੀ ਇੱਕ ਗੱਲ ਹੈ ਕਿ ਉਹਨੇ ਕਿਉਂ ਸ਼ੁਰੂ ਕੀਤੀ ਹੈ ਬਥਿਆ ਤੋਂ ਉਹ ਤੋਂ ਸੀ ਕਬੀਰ ਤਾਂ ਬਾਤ ਮਾ ਸੁਣੀ ਗਈ ਕੋ ਕਬੀਰ ਕਹਿੰਦਾ ਗੁਰਦੀਮੀ ਵਸ ਕਬੀਰ ਕੋ ਲੈ ਹੋ ਵਸ ਭਾਈ ਮੈਨੂੰ ਤਾਂ ਪਰਮੇਸ਼ਰ ਨੇ ਦਿੱਤੀ ਹੈ ਬਸ ਮੈਂ ਸੁਭਾਗ ਲਈ ਕਬੀਰ ਦੀ ਸੰਸਾਰ ਕੋ ਸੰਸਾਰ ਨੂੰ ਕਬੀਰ ਨੇ ਦੇ ਦਿੱਤੀ ਕਬੀਰ ਨੇ ਜੇ ਦੇਤੀ ਫਿਰ ਆਵਾਜ਼ ਨਹੀਂ ਰਹੀ ਫਿਰ ਏਕਮ ਜ਼ਰੂਰ ਸੀ ਘੱਟੋ ਘੱਟ ਐਨਾ ਵੀ ਜ਼ਰੂਰ ਪਤਾ ਬਿਲਾਵਲ ਮਹੱਲਾ ਪਹਿਲਾ ਛਿੱਤੀ ਘਰ ਦਸਵਾ ਜੱਤ ਪਿਆਰੀ ਨਾਲ ਲਿਖਿਆ ਇਹਦਾ ਕੀ ਭਾਵ ਹੈ ਜੀ ਬਿਲਾਵਲ ਰਾਗ ਦਾ ਨੋਨ ਨਹੀਂ ਹੈਗਾ ਅਸਲ ਵਿੱਚ ਰਾਗ ਕਹਿੰਦੇ ਨੇ ਰਾਗਨਾ ਮਤਲਬ ਬੋਲਣ ਬੋਲਣ ਦਾ ਨਰਾਗ ਹੈ ਜੋ ਬਲ ਮੁੱਖਿਆ ਕਰਦਾ ਔਰਾਗ ਹੈ ਰਗ ਤੋਂ ਬਹਿਰਾਗ ਵੱਲ ਨੂੰ ਜੜੇ ਬਲਾਵਨ ਬੋਲਦਾ ਬੋਲਦਾ ਨਾ ਜਦ ਆਉਂ ਵੀ ਬਾਹਰ ਬਲਾਬਲ ਕੀ ਉਹਦੇ ਚ ਕਲੀਅਰ ਹੁੰਦੀ ਹੈ ਗੱਲ ਇਹ ਬਲਾਇਆ ਬੋਲਦਾ ਕਾਬਲਾਵਲ ਹੈ ਹਾਂਜੀ ਆਪਾਂ ਉਹਦੇ ਚੋਂ ਵੀ ਪੜ ਲਾਂਗੇ ਕੀ ਹੈ ਵੀ ਲਿਖਿਆ ਜੀ ਸਿਹਾਰੀ ਨਾਲ ਜੱਤ ਜਾਂ ਹੁੰਦਾ ਹੈ ਜਾਂ ਬਣਿਆ ਹੈ ਬੁਲਾਇਆ ਜਾਂ ਬੋਲਦਾ ਬੋਲਣ ਦਾ ਯਤਨ ਕਰਦਾ ਕੋਈ ਕਹਿੰਦਾ ਬੁਲਾਇਆ ਜਾਂ ਬੋਲਦੇ ਬੋਲਦਾ ਹੈ ਬੋਲੋ ਯਤਨ ਕਰਦਾ ਯਤਨ ਕਰਕੇ ਬੋਲਣ ਦਾ ਯਤਨ ਇਹ ਅਗੱਧ ਹੈ ਕਦਮ ਦਾ ਯਤਨ ਕੀਤਾ ਕਦੀ ਧੋਗ ਨਹੀਂ ਗਈ ਸਮਝਾਉਣ ਦਾ ਪਰਨ ਯਤਨ ਕੀਤਾ ਪਰ ਸਮਝਾ ਗਿਆ ਗੁਜਰਣ ਵਾਲੀ ਗੱਲ ਫੇਰ ਉੱਥੇ ਵੀ ਉੱਥੇ ਖੜੀ ਹੈ ਇੰਨਾ ਕੁਝ ਕਹਿ ਕੇ ਵੀ ਵਾਲੀ ਗੱਲ ਵੀ ਸਾਹ ਤੇ ਫੜੀ ਹੋਈ ਹੈ ਠੀਕ ਆਪਾਂ ਬਿਲਾਵਲ ਦਾ ਵੀ ਥੋੜਾ ਕਰ ਲੈਨੇ ਆ ਜਿਹੜੀ ਬਿਲਾਵਲ ਬਿਲਾਵਲ ਤਬਹੀ ਜੇ ਨਾਮ ਹੋਜੇ ਜੇ ਨਾਮੇ ਨਹੀਂ ਬਿਲਾਵਲ ਬੁਲਾਏ ਕਿੱਥੇ ਬੋਲਦਾ ਠੀਕ ਹੈ ਜੇ ਨਾਮ ਤੋਂ ਬਿਨਾ ਕੁਝ ਹੋਰ ਬੋਲਦਾ ਬਿਲਾਵਲ ਰਾਗ ਨਹੀਂ ਉਹਨੂੰ ਕਹਿ ਸਕਦੇ ਅੱਛਾ ਜੀ ਅਗਲੀ ਤੁਕ ਕਹਿੰਦੇ ਆ ਉਹ ਰਾਗ ਨਾਦ ਸ਼ਬਦ ਸੋਹਣੇ ਜਦ ਲਾਗੇ ਸਹਿਜ ਧਿਆਨ ਰਾਗ ਬਲਾਵਰ ਨਾਦ ਇਹ ਸੋਹਣੇ ਆਵਾਜ਼ ਹੁੰਦੀ ਹੈ ਨਾਦ ਸੋਹਣੇ ਤਾਂ ਨੇ ਜੋ ਸਹਿਜ ਜੇ ਜਗ ਕੇ ਧਿਆਨ ਸ਼ਬਦ ਨਾਲ ਜੁੜੀ ਹੋਵੇ ਫੇਰ ਸੋਹਣੇ ਆਵਾਜ਼ ਨਿਕਲਦੀ ਹੈ ਫੇਰ ਸਾਰੇ ਗਾਈ ਜਾਂਦੇ ਗੱਲ ਮਾਇਆ ਦੀ ਕਰਦੇ ਰਾਗ ਬਲਾਵਲ ਹੈ ਅੱਗੇ ਕਹਿੰਦੇ ਆ ਜੀ ਰਾਗ ਨਾਦ ਛੋੜ ਹਰ ਸੇਵੀ ਹੈ ਤਾਂ ਦਰਗਾ ਪਾਈਏ ਮਾਨ ਅਗਲੇ ਰਾਗਨਾਦ ਉਹ ਆ ਦੂਏ ਰਾਗਨਾਦ ਅੱਛਾ ਛੱਡ ਕੇ ਜੇ ਹਰਦੀ ਸੇਵਾ ਕਰੀਏ ਸੇਵਾ ਕਰਦੇ ਜਦ ਅਸੀਂ ਸ਼ਬਦ ਵਿਚਾਰ ਕਰਦੇ ਉਹਦੇ ਨਾਲ ਦਰਗਾਹ ਜਮਾਨ ਮਿਲਦਾ ਜਿਵੇਂ ਹੁਣ ਰਾਗੀ ਸਿੰਘ ਗਾਉਂਦੇ ਆ ਬਿਲਾਵਲ ਰਾਗ ਇਹਨਾਂ ਇਹ ਵੀ ਹਰਦੀ ਸੇਵਾ ਕਰ ਉਹ ਵਾਗੇ ਤੇ ਕਰਦੇ ਨੇ ਸ਼ਬਦ ਵਿਚਾਰ ਕਿਤੇ ਕਰਦੇ ਇਹ ਤਾਂ ਰੋਟੀਆਂ ਕਾਲ ਨੂੰ ਪੂਰਨ ਦਾਲ ਹੈ ਉਹ ਗੋਸਾ ਕਾਲ ਨੂੰ ਯਾਦ ਕਿਤੇ ਐਨਾ ਹੋਵੇ ਵੀ ਰਾਗ ਨਾਦ ਸ਼ਬਦ ਸੋਹਣੇ ਐਸੇ ਲਾਈਨ ਨੂੰ ਉਹ ਪਦਾਰ ਬਣਾ ਕੇ ਭਾਈ ਸੋਲੇ ਤਾਂ ਉਹ ਨਾ ਦੇ ਜਿਹਨੇ ਤੇ ਗਾਇਆ ਅਸੀਂ ਪੜਦੇ ਹਾਂ ਗਾਇਆ ਤਾਂ ਜਿਹੜੇ ਗਾਇਆ ਤਾਂ ਇਹੋ ਜਿਹਨੇ ਦੇਖਿਆ ਅਸੀਂ ਗਾ ਤਾਂ ਪੜ ਰਹੇ ਹਾਂ ਬਸ ਇਹ ਤਾਂ ਪੜ ਰਹੇ ਹਾਂ ਇਹ ਗਾਤਾ ਉਹਨੂੰ ਅਸੀਂ ਗਾਉਣਾ ਨਹੀਂ ਕਹਿ ਸਕਦੇ ਇਹ ਤਾਂ ਸਿਰਫ ਅਸੀਂ ਪੜ ਰਹੇ ਹਾਂ ਚਲ ਐਨਾ ਹੈ ਕਿ ਨਾਲ ਤਬਲਾ ਬਾਜਾ ਵੱਜ ਰਿਹਾ ਪਰ ਅਸਲ 'ਚ ਪੜੇ ਰਹੇ ਹਾਂ ਭਾੜੀ ਪੜ ਰਹੇ ਹਾਂ ਇਹ ਜਿਹੜੀ ਅਗਲੀ ਪੰਕਤੀ ਆ ਉਹ ਮਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਾਨਕ ਗੁਰਮੁਖੀ ਬ੍ਰਹਮ ਵਿਚਾਰੀਐ ਚੂਕੇ ਮਾਨਵ ਮਾਨ ਬ੍ਰਹਮ ਵਿਚਾਰਾ ਸਾਡੀ ਗੁਰਬਾਣੀ ਬ੍ਰਹਮ ਦਾ ਵਿਚਾਰ ਹੈ ਜਿਵੇਂ ਗੁਰਮਖ ਜਦੋਂ ਬਰਮ ਵਿਚਾਰ ਕਰਦੇ ਨੇ ਗੁਰਮੁਖੀ ਵਿਚਾਰ ਕਰਦੇ ਨੇ ਫਿਰ ਮਾਨ ਅਰ ਭਵਨ ਦੋਏ ਨਹੀਂ ਰਹਿੰਦੇ ਜਿਉਂ ਕਹਿੰਦੇ ਨੇ ਕਿਸੇ ਨੂੰ ਕੋਈ ਜਹੰਕਾਰ ਦੀ ਗੱਲ ਨਹੀਂ ਹੁੰਦੀ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ ਇਹ ਕਹਿੰਦੇ ਚੁੱਕ ਜਾਂਦਾ ਹੈ ਉਹਨੂੰ ਦੀ ਗੱਲ ਨਹੀਂ ਹੁੰਦੀ ਸਿੱਖਿਆ ਦੀ ਗੱਲ ਹੁੰਦੀ ਹੈ ਉਹ ਨੂੰ ਨਹੀਂ ਕਿਹਾ ਵਿਚਾਰਨ ਪਰ ਜ਼ਿਆਦਾ ਜੁਰ ਦਿੱਤਾ ਹੈ ਕੱਲਾ ਪੜਨਾ ਨਹੀਂ ਹੈ ਆਪ ਪੜਦਾ ਵਿਚਾਰ ਕੇ ਕੁਝ ਮਿਲ ਲੈਣੇ ਚੋ ਠੀਕ ਹੈ ਜੀ ਵਿਚਾਰੇ ਤਾਂ ਇਹ ਗੱਲ ਹੈ ਵਿਚਾਰੇ ਤਾਂ ਵਾਲੀ ਗੱਲ ਤਾਂ ਫਿਰ ਤੇ ਪਈ ਇੱਕ ਓੰਕਾਰ ਸਤਗੁਰ ਪ੍ਰਸਾਦ ਏਕਮ ਏਕ ਓੰਕਾਰ ਨਿਰਾਲਾ ਏਕਮ ਦੇ ਸ਼ੁਰੂ ਹੋ ਗਿਆ ਨਾ ਏਕਮ ਵਾਲੇ ਥੋੜੀ ਲਾਈਟ ਹੁੰਦੀ ਹੈ ਚੰਦਰ ਮੇਦੀ अच्छा केंद्र में तो पंजी हम्म हम्म वो ओली जी वो ओली जी लाइट हुंदी है ये नहीं बसिया का है नहीं और बहुत ही लाइट भी है जी जय जी सानू ਹੈ मूर्ति पूजा है, है नहीं ये नहीं वो नहीं पर मूर्ति पूजा ही किस ਕਰੀ ਜਾਂਦੇ ਆ ਬਹੁਤਾ ਫਰਕ ਬਣੀ ਹੈ मूर्ति पूजा ਦਾ ਉਹ ਸਾਡੇ ਕੋਲ ਗਾਹਾਂ ਬਦਨਾ ਹੈ ਸਾਡੇ ਹਾਂਜੀ ਉਹ ਜੇ ਆਪਾਂ ਭਗਤ ਕਬੀਰ ਜੀ ਦਾ ਉਹ ਸ਼ਲੋਕ ਪੜ੍ਹੀਏ ठाकुर पूजे मोरलें भूलें पतके खाएं ਆਪਾਂ ਕੋਈ ਬਹੁਤੇ ਦੂਰ ਨਹੀਂ ਆਉਂਛੇ ਲੋਕ ਤੋਂ ਹਾਂਜੀ ਕਿਤੇ ਉੱਥੇ ਰਹਿ ਜਾਗੇ ਖੜੇ ਠੀਕ ਹੈ ਜੀ ਨਹੀਂ ਚਾਹੁੰਦੇ ਨਹੀਂ ਕਹਾਂ ਜਾਣਾ ਅਸਲ ਦੇ ਵਿੱਚ ਉਹ ਭੜਕਾਉਂਦੇ ਨੇ ਵੀ ਜਾਣਗੇ ਸਾਡੀ ਜਿਹੜੀ ਅਗੇ ਅਸੀਂ ਕਹਿ ਚੁੱਕੇ ਹਾਂ ਮਹਾਪੁਰਸ਼ ਡਿਕਲੇਅਰ ਕਰ ਚੁੱਕੇ ਆ ਸਾਡੀ ਬੇਇਜ਼ਤੀ ਹੈ ਤੇ ਚਲੋ ਜਿੰਨਾ ਹੀ ਸੀਗੀ ਉਹਨਾਂ ਨੇ ਕਹਿ ਗਏ ਉਹ ਹਾਂਜੀ ਉਦੋਂ ਗੱਲਾਂ ਆਪਾਂ ਨੂੰ ਕੌਣ ਹਰ ਜਾਇ ਖੋਜ ਚੱਲਦੀ ਹੈ ਸਾਰੀਓ ਖੋਜ ਚੱਲਦੀ ਹੈ ਫੈਸਲ ਦੀ ਵੀ ਚੱਲਦੀ ਹੈ ਸਾਰੇ ਪਿਛੇ ਤੇ ਖੋਜ ਚੱਲ ਰਹੀ ਹੈ ਤੁਸੀਂ ਪਿਛੇ ਨੂੰ ਕਦੇ ਜਾਂਦੇ ਹੋ ਇਹ ਇਕਮਤਾ ਹੋ ਗਿਆ ਪਹਿਲੀ 39 ਹੈ ਜੀ ਬਾਜੀ ਇਕੰਕਾਰ ਇਹ ਓੰਕਾਰ ਨਾਲ ਲਿਖਿਆ ਨਿਰਾਲਾ ਆਇਆ ਤਾਂ ਵਖਰਾ ਹੈ ਇਕੰਕਾਰ ਵੀ ਨਿਰਾਲਾ ਹੀ ਹੈ ਸਭ ਪਰ ਜਦੋਂ ਆਪਾਂ ਸ਼ੁਰੂ ਕਰਦੇ ਆਂ ਬਾਣੀ ਉੱਥੇ ਆਪਾਂ ਇੱਕ ਓੰਕਾਰ ਲਿਖਿਆ ਹਮੇਸ਼ਾ ਹੀ ਲਿਖਦੇ ਆਂ ਸਤਗੁਰ ਪ੍ਰਸਾਦ ਤਾਂ ਓੰਕਾਰ ਔਰ ਇਕੰਕਾਰ 'ਚ ਕੀ ਫਰਕ ਹੈ ਕੋਈ ਹੁਕਮ ਦੀ ਵਿਆਖਿਆ ਹੈ अच्छा ओमकार का हुक्म आ गया लो एक बार भी एक तो पहला एक क्यों लिखया एक ओमकार भी एक ने ओमकार ਦਾ ਰੂਪ एक ओमकार थी वो ज्योत थी पहला ज्योत भी है बोलदा भी है और कुछ ज्ञान द인다 है, है। वो जागृत अवस्था है सुन्न समाध नहीं इच्छा भी है कुछ आप भी है पहला इच्छा रहत ਇੱਛਾ ਰਹੇ ਦਾ ਓੰਕਾਰ ਹੈ ਇੱਛਾ ਸਹਿਤ ਹੈ ਫਿਰ ਊੰਕਾਰ ਇੱਕ ਊੰਕਾਰ ਹੈ ਜਿਹਦਾ ਵਸਾਜੇ ਓੰਕਾਰ ਹੈ ਤੁੰਨਾ ਵਸਾਜੇ ਓੰਕਾਰ ਹੈ ਉਹੀ ਬੀਜ ਵਿੱਚ ਜਿਹੜਾ ਪੇੜ ਪਿਆ ਹੈ ਬੀਜ ਵਿੱਚ ਹੈ ਪੇੜ ਉਹ ਓੰਕਾਰ ਹੈ ਅੱਛਾ ਜੀ ਜੇ ਜੜ ਫੜ ਗਿਆ ਜਾ ਗਿਆ ਆ ਫਿਰ ਓੰਕਾਰ ਹੈ ਫਿਰ ਵੱਡੂਗਾ ਤੇ ਆਪਾਂ ਇਹ ਵੀ ਕਹਿ ਸਕਦੇ ਆ ਵੀ ਓੰਕਾਰ ਜਿਹੜਾ ਅੱਖਰ ਹੈਗਾ ਗੁਰਬਾਣੀ ਵਿੱਚ ਇਹ ਬਿਰਛੂਤ ਹੈ ਠੀਕ ਹੈ ਇਹਨੂੰ ਪਲੂਰਲ ਚ ਲਿਖਿਆ ਜਾਂਦਾ ਹੈ ਇਹਦੇ ਪਰ ਔਂਕੜ ਨਹੀਂ ਹੁੰਦਾ ਬਹੁਤ ਜਗ੍ਹਾ ਜਿੱਥੇ ਲਿਖਿਆ ਉਹਦਾ ਕੀ ਭਾਵ ਹੁੰਦਾ ਜਿੰਨੇ ਵੀ ਛੱਜ ਛੱਜ ਦੀ ਭਗਤ ਵਾਦ ਦੇ ਨੂੰ ਛਾਹੇ ਅੱਛਾ ਜੀ ਉਹ ਹੁਕਮ ਉਹ ਕੁਲੇ ਅਨੇਕ ਹੈ ਪਰ ਅਨੇਕ ਹੁੰਦੇ ਹੋਏ ਵੀ ਇੱਕ ਹੈ ਉਥੇ ਇੱਕ ਹੋਈ ਸਕਦਾ ਸ਼ਬਦ ਰੂਪ ਚ ਇੱਕ ਹੈ ਸ਼ਬਦ ਆ ਉਹ ਦੇਖਦੇ ਹਾਕ ਨੂੰ ਇਹ ਨਹੀਂ ਹੋ ਕਮੇਗਾ ਜੇ ਫਿਰ ਆਪਾਂ ਇੱਕ ਓੰਕਾਰ ਲਿਖਦੇ ਆਂ ਇਹਦਾ ਭਾਵ ਇਹ ਜਿਹੜਾ ਓੰਕਾਰ ਆਪਾਂ ਵੀ ਫਿਰ ਬਹੁਵਚਨ ਤੇ ਆਊਗਾ ਹਾਂਜੀ ਬਹੁਵਚਨ ਤੇ ਆਊਗਾ ਇਤਨਾ ਬਾਣੀ ਦਾ ਨਾਮ ਜੀ ਬਾਣੀ ਦਾ ਨਾਮ ਜਿਹੜਾ ਹੋਏਗਾ ਓੰਕਾਰ ਹੈਗਾ ਬਾਣੀ ਦਾ ਨਾਮ ਤੇ ਉਹ ਤਾਂ ਆਪਾਂ ਨੂੰ ਪਤਾ ਕਿ ਗੁਰਬਾਣੀ 'ਚ ਕਿਸੇ ਅੱਖਰ ਨੂੰ ਜੇ ਨਾਮ ਜਾਂ ਨਾਉਨ ਬਣਾਉਣਾ ਹੋਵੇ ਤਾਂ ਓੰਕਾਰ ਲੱਗਦਾ ਉਹਦਾ ਨਾਮ ਕਰਕੇ ਲਿਖਿਆ ਹੋਇਆ ਨਾ ਔਂਕਰ ਆਇਆ ਹੈ ਨੇ ਪਾਣੀ ਨੂੰ ਸਪਰੇਟ ਕੀਤਾ ਉਹਨੇ ਸਾਰਾ ਟੋਟਲ ਪਾਣੀ ਥੋੜੀ ਸਪਰੇਟ ਕਰਤਾ ਉਹਨੇ ਇੱਕ ਡ੍ਰੌਪ ਸਪਰੇਟ ਕਰਕੇ ਇਹ ਥੋੜਾ ਜਿਹਾ ਪਾਣੀ ਸਪਰੇਟ ਕਰਕੇ ਦੇਖ ਲਿਆ ਹਾਂਜੀ ਉਹਦਾ ਇੱਕ ਯੂਨਿਟ ਨੂੰ ਲੈ ਕੇ ਔਂਕਾਰ ਦੀ ਗੱਲ ਕੀਤੀ ਹੋਈ ਹੈ ਅਜੇ ਕੋਈ ਹੋਰ ਵੀ ਗੱਲ ਤੇ ਠੀਕ ਹੈ ਇੱਕ ਜਗ੍ਹਾ ਨੂੰ ਕੀਆ ਜਨ ਚਿੱਤ ਦਾ ਮਤਲਬ ਜਿੱਤਣਾ ਹੁੰਦਾ ਹੈ ਜੋ ਪਹਿਲਵਾਨ ਚਿੱਤ ਕਰਤਾ ਅੱਛਾ ਜੀ ਚਿੱਤ ਕਰਤਾ ਇਹਦਾ ਭਾਵ ਬਣਦਾ ਹੈ ਜੀ ਹੈ ਨਾ ਚਿੱਤ ਕਰਤਾ ਦਾ ਮਤਲਬ ਹੈ ਉਹਨੇ ਜਿੱਤ ਲਿਆ ਮਨ ਨੂੰ ਮਾਇਆ ਤੋਂ ਪੁੱਠਾ ਕਰਕੇ ਰੱਖ ਦਿੱਤਾ ਠੀਕ ਹੈ ਜਦੋਂ ਆਪਾਂ ਲਿਖਦੇ ਓੰਕਾਰ ਬ੍ਰਹਮਾ ਉਤਪੱਤ ਵਿਆ ਉਤਪਤੀ ਆ ਬ੍ਰਹਮਾ ਜਿਹੜਾ ਸੀ ਜੀਵ ਓੰਕਾਰ ਨੇ ਪੈਦਾ ਕੀਤਾ ਸੀ ਅਸ ਓੰਕਾਰ ਇੱਥੇ ਹੁਕਮ ਜੀ ਹਾਂ ਹੁਕਮ ਨਾਲੇ ਪੈਦਾ ਹੋਇਆ ਠੀਕ ਹੈ ਬਣ ਗਿਆ ਜਦੋਂ ਨੇ ਬ੍ਰਹਮਾ ਨੂੰ ਫੇਰ ਚਿੱਤ ਕਰਕੇ ਆਪਣੇ ਵਿੱਚ ਬੁਲਾ ਲਿਆ ਉਹ ਵੀ ਓੰਕਾਰ ਬਣ ਗਿਆ ਜਿਹਨੇ ਬ੍ਰਹਮਾ ਨੂੰ ਚਿੱਤ ਆਪਣੇ ਵਿੱਚ ਬੁਲਾ ਲਿਆ ਮਾਨ ਜੀ ਨੇ ਜਿੱਤ ਕੇ ਆਪਣੇ ਵਿੱਚ ਬੁਲਾ ਲਿਆ ਨੰਦਪਾਪ ਕੀ ਪਹਿਲਾਂ ਇੱਕ ਤੋਂ ਦੋ ਹੋਏ ਸੀ ਕਿ ਓਂਕਾਰ ਤੋਂ ਬ੍ਰਹਮਾ ਨਿਕਲ ਗਿਆ ਸੀ ਬਾਹਰ ਫਿਰ ਦੋ ਤੋਂ ਇੱਕ एक ਕੇ ਉੱਗਿਆ ਆ ਠੀਕ ਹੈ ਇਹ ਫਿਰ ਕੀ ਆ ਜਨ ਚਿਤ ਉਦੀ ਗੱਲ ਹੋ ਰਹੀ ਹੈ ਉਹੋ ਜਿਹਾ ਹੀ ਹੋ ਗਿਆ ਠੀਕ ਹੈ ਜੀ ਜਿਹੜਾ ਬਾਗ ਹੈ ਬਾਗ ਦੇ ਕਪੇੜ ਜਮ ਹੈ ਬਾਗ ਦੇ ਵਿੱਚ ਹੁਣ ਆਪਾਂ ਓੰਕਾਰ ਦਾ ਤਾਂ ਕਲੀਅਰ ਕਰ ਲਿਆ ਵੀ ਓੰਕਾਰ ਹੁਕਮ ਦਾ ਨੋ ਹੈ ਹੁਕਮ ਸੁੰਨ ਸਮਾਦ ਤੋਂ ਸਹਿ ਸਮਾਦ ਹੋਇਆ ਤਾਂ ਜੋਤ ਹੈ ਸਾਡੇ ਅੰਦਰ ਏਕ ਓੰਕਾਰ ਵੀ ਹੈ ਸਾਡੇ ਅੰਦਰ ਏਕ ਓੰਕਾਰ ਜਾਦੂ ਜਾਸੀ ਇੱਕ ਹੋ ਜਾਗੇ ਅਸੀਂ ajo ਏਕ ਦੇ ਅੰਡੇ ਚ ਅੱਛਾ ਜੀ ਫਾਇਦਾ ਇਹ ਹੰਸ ਪਰ ਪਰਮਾਂਸ ਨਹੀਂ ਹੈ ਅੱਛਾ ਸ਼ਾਮ ਸੁੰਦਰ ਹੈ ਜੀ ਹਾਂ ਹਾਂ ਜੇ ਬਾਇਆ ਤਾਂ ਬਾਹਰ ਨਹੀਂ ਜਾ ਸਕਦਾ ਰਜਨਾ ਤਾਂ ਬਾਹਰ ਨਹੀਂ ਜਾ ਸਕਦਾ ਜਾ ਕੇ ਕੋਈ ਅਸਰ ਨਹੀਂ ਹੋਊਗਾ ਪਰਮ ਦਾ ਕਾਬਿਲ ਮਨ ਜਿੱਤੇ ਜਾਊ ਜਦ ਮਨ ਸ਼ਾਂਤ ਹੋ ਫਿਰ ਇੱਕ ਊਂਕਾਰ ਹੈ ਇਹ ਊਂਕਾਰ ਤਾਂ ਜਦ ਹੋਊਗਾ ਜਦ ਸੱਖਣ ਚ ਲਿਆ ਜਾਊ ਅਸਰੀਰ ਜੀ ਹੋ ਸਕਦਾ ਜਿਨਾ ਕੇ ਸਰੀਰ ਤੇ ਬੁਲਾਇਆ ਬੋਲੂਗਾ ਅਜਾ ਸ਼ਰੀਰ ਚੇ ਵੱਤੋ ਵਦ ਇੱਕ ਓੰਕਾਰ ਦੀ ਹੋ ਸਕਦਾ। ਤੇ ਜਦੋਂ ਇਹਨੂੰ ਚਾਰੇ ਪਦਾਰਥ ਮਿਲ ਗਏ ਫਿਰ ਇਹ ਉੱਗ ਪਿਆ ਫਿਰ ਇਹ ਓੰਕਾਰ ਹੋ ਜਾਏਗਾ। ਉਹ ਮਾਇਆ ਛੱਡ ਕੇ ਪਰੇਗਾ ਵੀ ਜਾਊਗਾ ਤਾਂ ਨੀਂਦ ਹੋ ਗਿਆ ਉਹ ਦਰਿਆ ਉਹਨਾਂ ਜਿਹੜਾ ਜਿੰਨਾ ਚਿਰ ਚੱਲਦਾ ਸਮੁੰਦਰ ਵੱਲ ਸਮੁੰਦਰ ਹੋ ਗਿਆ ਫਿਰ ਉਹ। ਜਿੱਥੇ ਪਾਣੀ ਰੁਕ ਗਿਆ ਉਹ ਸਮੁੰਦਰ ਹੋ ਗਿਆ। ਜਿੰਨਾ ਚਿਰ ਥੋੜੀ ਚੱਲ ਹੈ ਵਿੱਚ ਉਹਨਾਂ ਜਿਹੜੋ ਦਰਿਆਏ ਜਿਹਨਾਂ ਜਰ ਮਨੂਸ਼ਾ ਇਨਕਾਰੀ ਹੈ ਉਹਨਾਂ ਜਿਹੜਾ ਬਸ ਜੀਵਾ ਹੋ ਗਿਆ ਪੂਰਾ ਪ੍ਰਭ ਵੀ ਕਹਿ ਸਕਦੇ ਆਪਾਂ ਇਹਨੂੰ ਹਾਂ ਪੂਰਾ ਪ੍ਰਭ ਤਾਂ ਕਹਿ ਸਕਦੇ ਪੂਰ ਬ੍ਰਹਮ ਵੀ ਕਹਿ ਸਕਦੇ ਪੂਰਾ ਗੁਰੂ ਵੀ ਕਹਿ ਸਕਦੇ ਪੂਰੇ ਗੁਰ ਕਾ ਠੀਕ ਹੈ ਵੀ ਹੈ ਫਿਰ ਇਹ ਹਾਂ ਵੀ ਪੂਰਾ ਹੈ ਪੂਰਾ ਕਿਆ ਕਰੇ ਜੇ ਇਕ ਅੰਕਾਰ ਬਾਰੇ ਆਪਾਂ ਨੂੰ ਹੁਣ ਹੋ ਗਿਆ ਅਸੀਂ ਡਿਵੈਲਪਮੈਂਟ ਵੱਲ ਆਖਰੀ ਹੋ ਸਕਦੇ ਹਾਂ ਇਹ ਗੁਰਬਾਣੀ ਤੋਂ ਸੇਤ ਲੈ ਲਈਏ ਮਾਇਆ ਉਹ ਤਿਆਗ ਠੀਕ ਹੈ ਜੀ ਅਮਰ ਅਜੂਨੀ ਜਤ ਨਜਾਲਾ ਅਮਰ ਹੈ ਉਹ ਉਸ ਦੀ ਇਹ ਜਵਸਤਾ ਹੀ ਰਹਿੰਦਾ ਸਤਗੁਰ ਜਾਗਦਾ ਹੈ ਦਿਓ ਉਹ ਫਿਰ ਜਾਂਗਰ ਦਾ ਵਸਤਾ ਕਿਹਾ ਹੌਂਦਾਰੀ ਅਮਰ ਜੋਨੀ ਜੋਨੀ ਨਹੀਂ ਹੁੰਦਾ ਫਿਰ ਅਬਾ ਨਾਲ ਅਜੋਨੀ ਕਿਉਂ ਲਿਖਿਆ ਅਮਰ ਜੀ ਵੀ ਹੈ ਜੀ ਵੀ ਨਹੀਂ ਵਰਦਾ ਮਰਦਾ ਜੀ ਵੀ ਨਹੀਂ ਹੈਗਾ ਉਹ ਜਾਂਗਰ ਦਾ ਹੌਂਦਾਰ ਆਇਆ ਇੱਕ ਦਿਨ ਸੋਹਣ ਹੋਏ ਕੋ ਲੰਬੇ ਗੋੜ ਪਸਾਰ ਜਿੰਨਾ ਜਿਹੜੇ ਜੂਨ ਚਲਦਾ ਉਹਨਾਂ ਜਿਹੜੇ ਨੂੰ ਅਵਰੀ ਕਹਿੰਦੇ ਪਾਲ ਬਸ ਹੈ ਉਹ ਜੰਮਣ ਮੰਨ ਖਾਣ ਜਾਂਦਣ ਗਿਆ ਉਦੋਂ ਫਿਰ ਉਹਨਾਂ ਅਜੋਨੀ ਲੱਗ ਜਾਂਦਾ ਨਾਲ ਉਹ ਉੱਥੇ ਕੱਲਾ ਹਮ ਲੱਗਿਆ ਹੋਇਆ ਜੋਨੀ ਦੀ ਨਾਲ ਲੱਗਿਆ ਇੱਕ ਆਮਲ ਜੋਨੀਆਂ ਦੇ ਵਿੱਚ ਇੱਕ ਆਮਲ ਆ ਜਾਂਦੀ ਹੈ ਠੀਕ ਹੈ ਜਿਹੜਾ ਅੱਧਾ ਹੈਗਾ ਉਹ ਜਦੋਂ ਜੀਵ ਰੂਪ ਚ ਹੈ ਇਹ ਜੰਤ ਹੰਸ ਰੂਪ ਦੀ ਵੀ ਜੋਨੀ ਦੀ ਹੈ ਅੱਛਾ ਜੀ ਪਰਮਾਨਸਾ ਕੇ ਜੋਨੀ ਹੈ ਕੋਈ ਸਰੀਰ ਛੁੱਟ ਗਿਆ ਸਰੀਰ ਮਾਇਆ ਛੁੱਟ ਗਈ ਆ ਛੁੱਟ ਗਈ ਠੀਕ ਹੈ ਜੀ ਜਾਤ ਦਾ ਭਾਵ ਜਾਤੀ ਨਾ ਜੱਲ ਆਲਾ ਬਰੇ ਨਹੀਂ ਕੋਈ ਦੇਖਿਆ ਨਾ ਕੋਈ ਜੰਮ ਜਾਲ ਹੈ ਜੰਮ ਦੇਖਿਆ ਦੇਖੋ ਖੋਜਿਆ ਉਹਨਾਂ ਨੇ ਵੀ ਹੈ ਜਿਹਨਾਂ ਨੇ ਲਿਖਿਆ ਹੈ ਅਸੀਂ ਵੀ ਨਾ ਖੋਜੇ ਗਈ ਜਾਂਦੇ ਆ ਕਹਿੰਦੇ ਨੇ ਅਸੀਂ ਆਪ ਖੋਜਦੇ ਆ ਕਹਿੰਦੇ ਅਗਮ ਹੈ ਇਹ ਪਾਣੀ ਮੁਕੀ ਤੋਂ ਪਰੇ ਦੀ ਗੱਲ ਹੈ ਉਹ ਕੋਈ ਦਾ ਵਿਖਾ ਹੈ ਪਰਬਤ ਉਹੀ ਲਿਬਰ ਮੰਗਣ ਦੀ ਬਣ ਜਾਂਦੇ ਹਨ ਸੰਤ ਕਹਿੰਦੇ ਮੁdrukੀ ਬੁੰਦੀ ਤੋਂ ਕਰੇ ਦੀ ਗੱਲ ਆ ਗੁਰਬਾਣੀ ਦੀ ਖੋਜ ਉਹ ਗੁਰਬਾਣੀ ਲੱਗਣੀ ਹੈ ਫਫਜਲ ਕਰਦੂ ਚਿਰਦੀ ਲੱਗਣਾ ਫਿਰ ਜਦ ਖੋਜ ਲਿਆ ਸਮਝ ਲਿਆ ਫਿਰ ਸਾਰਿਆਂ ਦੇ ਵਿੱਚ ਇਹੀ ਹੈ ਉਹ ਕੋਈ ਨਹੀਂ ਇੱਕ ਬੀਜ ਜਿਹੜਾ ਕਣਕ ਹੈ ਸੱਚੇ ਬੀਜ ਦੇ ਕਣਕ ਦੇ ਇਹ ਜੇ ਕੱਚਾ ਕਾਢ ਲਈ ਇਹ ਨਹੀਂ ਜਾਂਦਾ ਹੈ ਪੱਕਾ ਹੋਏ ਤੇ ਜੰਮੂਗਾ ਬਹੁਤ ਕੱਚਾ ਹੋਰ ਕੀ ਹੈ ਰੂਪ ਨਾ ਰਿਖਿਆ ਕੋਈ ਰੂਪ ਨਹੀਂ ਉਹਦੀ ਕੋਈ ਰੂਪ ਰੇਖ ਨਹੀਂ ਹੁੰਦਾ ਜੋਤ ਕੱਚਾ ਹੋਵੇ ਜਾਂ ਪੱਕਾ ਹੋਵੇ ਸਾਰਿਆਂ ਜਿਹੜਾ ਮਾਇਆ ਦੇ ਵਿੱਚ ਵੀ ਰੂਪ ਰੇਖ ਤੋਂ ਪਰਿਆ ਮੁਕਤਾ ਹੈ ਅਗੋਚਰਤਾ ਨਾਲ ਯੇਨਾ ਬੁੱਧੀ ਦੇ ਸਮੇਤੋ ਪਰੇ ਖੋਜਤ ਖੋਜਤ ਘਟ ਘਟ ਦੇਖਿਆ ਘਟੀਂ ਘਟੀਂ ਦੇਖਿਆ ਸਾਰਿਆਂ ਦੇ ਅੰਦਰ ਹੈ ਹਰ ਦੇਜਾ ਕੋਈ ਇਹ ਆ ਘਟ ਘਟ ਲਿਖਿਆ ਇਹਦਾ ਭਾਵ ਕੀ ਫਿਰ ਦੇਜਾ ਦਿਮਾਗ ਚ ਨਹੀਂ ਹਰ ਜੂ ਵਸਾ ਨੂੰ ਦਾ ਸੰਦਾਰ ਤਾਂ ਕਿ ਆਖੋ ਕੱਢ ਦਿਮਾਗ ਨੂੰ ਨਹੀਂ ਕਹਿੰਦੇ ਹੂੰ ਹੂੰ ਦਿਮਾਗ ਨੂੰ ਮਟਕੀ ਕਿਹਾ ਹੋਇਆ ਹੈ ਅੱਛਾ ਜੀ ਆਹੋ ਉਹਨੂੰ ਮਟਕੀ ਦਾ ਕਿਹਾ ਹੋਇਆ ਹੈ ਫਿਰ ਜਦਨੇ ਨੇ ਇਹ ਖੋਪੜੀਓ ਨੇ ਖੋਪੜੀ ਦੇ ਉੱਪਰ ਜਾਤੋਨ ਮਤਾਂ ਕਹਿੰਦੇ ਫਲਾਣੇ ਦੇ ਦਿਮਾਗ ਦੀ ਗਾੜ ਹੈ ਮਤਲਬ ਤਾਂ ਹੀ ਫਿਰ ਉਹ ਮਟਕੀ ਪਾਉਂਦੇ ਆ ਜਿੱਦਣ ਜਨਮ ਅਸ਼ਟਮੀ ਹੁੰਦੀ ਹੈ ਪਰ ਉਹਨਾਂ ਨੂੰ ਪਤਾ ਨਹੀਂ ਵੀ ਮਟਕੀ ਦਾ ਭਾਵ ਕੀ ਹੈ ਜੀ ਕੋਈ ਦੱਸੋਗਾ ਤਰੀਕਾ ਲੱਗੂਆ ਫੇ ਮੱਖਣ ਤਾਂ ਹੀ ਗਾਣਦੇ ਨੇ ਠੀਕ ਹੈ ਮਟਕੀ ਦੀ ਫੁੱਟੀ ਨੇ ਮੱਖਣ ਬਣਨਾ ਮਟਕੀ ਜੇ ਮੱਖਣ ਨਹੀਂ ਬਣਦਾ ਮਟਕੀ ਜੇ ਖਾਲੀ ਹਾਂਜੀ ਇਸ ਮਟਕੀ ਮੈਂ ਸ਼ਬਦ ਸੰਜੋਈ ਕਵੀ ਜੀ ਵੀ ਕਹਿੰਨੇ ਨੇ ਇਹਦੇ ਤਾਂ ਅੱਛਾ ਜੀ ਤੇ ਮੱਖਣ ਜਿਹੜਾ ਹੈਗਾ ਉਹ ਫਿਰ ਨਹੀਂ ਛਕਣਾ ਹੈ ਜੀ ਮਲਾੜੀ ਨੂੰ ਲੱਗਣਾ ਹੈ ਬੁੱਧੀ ਹੈ ਤੇ ਘਟ ਘਟ ਦੇਖਿਆ ਗੱਲ ਨੂੰ ਮੈਂ ਪਰਪੱਕ ਕਰ ਲਿਆ। ਘਟ ਦੇ ਦੇਖ ਜਦ ਦੇਖਣ ਤਾਂ ਵਗਾਵਾਂ। ਠੀਕ ਹੈ ਜੀ। ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ। ਗੁਰ ਪ੍ਰਸਾਦ ਪਰਮ ਪਦ ਪਾਈ। ਜਿਹੜਾ ਕਹਿੰਦੇ ਪਹਿਲਾਂ ਆਪ ਦੇਖ ਲਵੇ ਫਿਰ ਦਿਖਾਵੇ ਦੂਜੇ ਨੂੰ। ਐਵੇਂ ਨਾ ਬਿਨਾਂ ਦੇਖੇ ਦਿਖਾਉਣ ਲੱਗ ਜਵੇ। ਇੱਥੇ ਜਿੰਨੇ ਬਿਨਾਂ ਦੇਖੀ ਦਿਖਾ ਰਹੇ ਨੇ ਸੰਤ। ਮੇਰਾ ਸਮਝੇ ਪ੍ਰਚਾਰਕ ਸਮਝਾ ਰਹੇ ਨੇ ਸਾਨੂੰ ਸਿੱਖਾ ਨੂੰ ਆਹ ਤਾਂ ਹੀ ਹੈ ਆਪ ਸਮਝੇ ਨਹੀਂ ਸਮਝਾਉਣ ਪਹਿਲਾਂ ਲਾਗੇ ਕਿਹਾ ਕੀ ਸੀ ਕਿਹਾ ਸੀ ਪਰਸਪੇ ਮਨ ਪਰਬੋਧਾ ਆਪਣੋ ਪਾਛਵਾ ਪਰ ਹੁਕਮ ਦੀ ਉਹ ਬਗਿਆ ਸਰਤੀ ਹੁਕਮ ਸੀ ਸਾਨੂੰ ਇਹ ਤੇ ਹਾਂ ਤਾਂ ਤੇ ਹੋ ਰਹੀ ਧੀ ਸਾਡਾ ਜਿਹੜਾ ਹੈਗਾ ਜਵਾਨੀ ਜਵਾਨੀ ਗੁਰੂ ਹੈ ਸਿਰਫ ਮੰਨਣ ਨੂੰ ਤਾਂ ਹੈ ਨਹੀਂ ਉਹ ਬਥੇਰੇ ਵਾਲਾ ਵੀ ਚੋਲਾ ਹੀ ਉਹ ਵੀ ਨੀਲਾ ਨਹੀਂ ਪਾਉਂਦੇ ਪਤਾ ਨਹੀਂ ਕਿਉਂ ਚਿੱਟਾ ਨੀਲਾ ਪਾਉਣਾ ਨੀਲਾ ਨੀਲਾ ਸਾਡਾ ਗੁਰੂ ਦਾ ਗੋਜ। ਉਹ ਕੰਮ ਨਹੀਂ ਜਿਹੜਾ ਇਹ ਨਿਹੰਗ ਸਿੰਘਾਂ ਵਾਸਤੇ ਹੀ ਹੈ ਜੀ ਖਾਲਸੇ ਬਾਰੇ ਬਾਣੀ ਜੀ ਵੀ ਕਿਹਾ ਉਹ ਇਸ ਗੱਲ ਨੂੰ ਸਮਝਦੇ। ਉਹ ਭਵੇਂ ਦੇ ਨੇ ਉਹ ਇਹਨੇ ਹੈਗੇ ਨਾ ਲੱਡੇ ਉਹਦੇ ਵੇਲੇ ਕੀ ਕਰਕੇ ਨੀਲਾ ਨਹੀਂ ਕੌਣ ਮੰਨਦੇ ਤਾਂ ਹਮਰਾ ਹਿੰਦੂਆਂ ਦਾ ਕਾਲਾ ਮੁਸਲਮਾਨਾਂ ਦਾ ਬਿਲਕੁਲ ਨੀਲੇ ਕਰਕੇ ਆਦੂ ਨੀਲੇ ਸੀ ਹੋਰ ਸੀ ਨੀਲੇ ਬਾਰੇ ਨੀਲਾ ਅਸਲ ਤੇ ਰੰਗ ਹਾਜੀਆਂ ਦਾ ਸੀ ਮੁਸਲਮਾਨਾਂ ਦਾ ਆਦੂ ਆ ਕੇਸਰੀ ਸੀ ਹਿੰਦੂਆਂ ਦਾ ਸੀ ਤਾਂ ਦੋ ਰੰਗ ਦੀ ਰੱਸੀ ਬਣਾਉਂਦੀ ਵਾਦੋਏ ਕਾਹੀਓ ਦੋਏ ਬੰਦੇ ਤੇ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹ ਜਿਹੜਾ ਹੈਗਾ ਤੇ ਗੁਰੂ ਸੰਸਕ੍ਰਿਤ ਦਾ ਹਾਂ ਗੁਰੂ ਸੰਸਕ੍ਰਿਤ ਦਾ ਉਹ ਵੀ ਮੇਰੇ ਤਾਹੀ ਕੀਤਾ ਨਾ ਹਾਂਜੀ ਫਤਿਹ ਵੀ ਲਖਦਾ ਉਹਨਾਂ ਦਾ ਸਾਡੇ ਤਾਂ ਫਤਿਹ ਹੈ ਨਹੀਂ ਹਾਂ ਫਤਿਹ ਵੀ ਉਹਨਾਂ ਦਾ ਤੇ ਵੀ ਹੈ ਖਾਲਸਾ ਵੀ ਉਹਨਾਂ ਦਾ ਲਖਦਾ ਹਾਂਜੀ ਗੁਰੂ ਗੁਰੂ ਸਾਡਾ ਹਾਂ ਗੁਰੂ ਸਾਡਾ ਹਿੰਦੀ ਦਾ ਇਹੋ ਵਿਚਾਰਾਂ ਨੂੰ ਕੀ ਪਤਾ ਵੀ ਫਤਿਹ ਜੀ ਨੇ ਬਣਾਈ ਉਹਦਾ ਕਿੰਨਾ ਡੱਕ ਦਿਮਾਗ ਸੀ ਇਹਨਾਂ ਦਾ ਆਪਣਾ ਹੈ ਜੀ ਇਹ ਸਮਝਦੇ ਨੇ ਉਹ ਉਹਦਾ ਵੀ ਸੀ ਕਿ ਜੇ ਇਹ ਵਾਹਿਗੁਰੂ ਕਹਿਣਾ ਅੱਛੀ ਗੱਲ ਹੈ ਪਰਮੇਸ਼ਰ ਵਾਸਤੇ ਕਿਉਂਕਿ ਉਹ ਦੋਹੇ ਪਾਸਿਆਂ ਦੀ ਭਾਸ਼ਾ ਤੋਂ ਬਣਿਆ ਅਖਰ ਠੀਕ ਹੈ ਜੀ ਜੋ ਦੇਖ ਦਿਖਾਵੇ ਤਿਸ ਕੋ ਬਲਜਾਈ ਗੁਰਪ੍ਰਸਾਦ ਪਰੰਪਰ ਪਾਈ ਮੈਂ ਉਹ ਗੀਤ ਜਿਹੜਾ ਦੇਖ ਦਿਖਾਵੇ ਗੁਰ ਪਰਖਣ ਪਰਮਪਦ ਪਾਈ ਉਹਨੇ ਗਿਆਨ ਦੀ ਕਿਰਪਾ ਨਾਲ ਜਿਹੜਾ ਉਹਨੇ ਗਿਆਨ ਪਰਮਪਦ ਪ੍ਰਾਪਤੀ ਕਰ ਲਈ ਪਰਮਪਦ ਤੱਕ ਪਹੁੰਚ ਗਿਆ ਇੰਨਾ ਆ ਪਾਲਿਆ ਹੈ ਪਰਮਪਦ ਠੀਕ ਹੈ ਜੀ ਆਹ ਕਿ ਆ ਜਪ ਜਾਪੋਂ ਬਿਨ ਜਗ ਦੀਸੈ ਗੁਰ ਕੇ ਸ਼ਬਦ ਮਹਿਲ ਕਰ ਦੀਸੈ ਰਹਾਉ ਯੋ ਮੈਂ ਸਮਝ ਗਿਆ ਕੁਛ ਜਗਦੀਸ਼ ਦੇ ਜਪ ਨੂੰ ਜਾਪਾਂ ਜਿੰਦੀਸ਼ ਨੂੰ ਜਾਣੋ ਕੌਣ ਹੈ ਜਿਹਨੇ ਸੰਸਾਰ ਬਣਾਇਆ ਸੰਸਾਰ ਨੂੰ ਜਾਣ ਕੇ ਮੈਨੂੰ ਕੀ ਫਾਇਦਾ ਕਿ ਆ ਜਪ ਜਪੂ ਮੈਂ ਹੋਰ ਕੀ ਜਪ ਜਪਾਂ ਹੋਰ ਜਿਹੜੀ ਕਿਸੇ ਨੂੰ ਸੰਸਾਰ ਕੋਣ ਸਮਝ ਲੋ ਕੌਣ ਹੈ ਬਾਕੀ ਵਿੱਚੇ ਆ ਗਿਆ ਸਾਰਾ ਗੁਰ ਸਬਦੀ ਮਹਿਲ ਘਰ ਦੀ ਜਿਹੜੀ ਗੁਰਬਾਣੀ ਹੈ ਗੁਰਖਾ ਉਪਦੇਸ਼ ਹੈ ਇਹਦੇ ਨਾਲ ਮਹਿਲ ਵੀ ਨਹੀਂ ਗਿਆ ਘਰ ਵੀ ਦੀ ਗਿਆ ਉਹੀ ਘਰ ਹੈ ਉਹੀ ਮਹਿਲ ਹੈ ਰਾਜੇ ਦਾ ਘਰ ਹੈ ਮਹਿਲੇ ਕੋ ਹੁੰਦਾ ਜਦੋਂ ਚਾਰੇ ਪਾਸੇ ਮਿਲ ਗਿਆ ਬਲਾਖੀ ਰਾਜ ਬਣ ਗਿਆ ਘਰ ਮਹਿਲ ਕਿ ਹੋ ਗਿਆ ਵੈਲ ਘਰ ਘਰ ਹੀ ਮਹਿਲ ਬਣ ਗਿਆ ਹੁਣ ਇੱਥੇ ਦੂਸਰੀ ਗੱਲ ਸ਼ੁਰੂ ਹੁੰਦੀ ਹੈ ਜੀ ਜੁਜੇ ਭਾਏ ਲੱਗੇ ਪਸ਼ਤਾਣੇ ਜਮਦਰ ਬੰਦੇ ਆਵਣ ਜਾਣੇ ਲੇ ਭਾਈ ਇੱਕ ਮਿੰਟ ਦਾ ਇੰਤਜ਼ਾਰ ਦਿਓ ਗੱਲ ਕੀ ਜੋ ਦੀਓ ਗੱਲ ਕੀਤੀ ਹੈ ਦੂਜੀ ਤੇ ਧਰੂ ਆ ਦੂਜੀ ਮਾਇਆ ਫਿਰ ਮਾਇਆ ਦੀ ਗੱਲ ਸ਼ੁਰੂ ਕਰ ਲਈ ਦੂਏ ਤੇ ਕਹਿੰਦੇ ਦੂਏ ਤੇ ਭਾਈ ਮਾਇਆ ਹੈ ਮਾਇਆ ਦਾ ਵੀ ਗਿਆਨ ਹੈ ਮਾਇਆ ਦੀ ਵੀ ਤਾਂ ਗਿਆਨ ਹੈ ਉਹ ਆ ਸਾਰਾ ਮਾਇਆ ਦਾ ਗਿਆਨ ਜਿਹਨੇ ਸੰਸਾਰ ਵਿੱਚ ਖੋਜ ਕੀਤੀ ਹਾਂਜੀ ਮਾਇਆ ਦਾ ਗਿਆਨ ਵੀ ਜ਼ਰੂਰੀ ਹੈ ਕਿਉਂਕਿ ਇੱਥੇ ਦੋ ਬੰਦੇ ਨਾ ਖੁੰਬਾਂ ਬਾਹਰ ਉਗੀਆਂ ਸੀ ਖਾ ਕੇ ਮਰ ਗਏ ਉਹਨਾਂ ਨੂੰ ਪਤਾ ਨਹੀਂ ਸੀ ਕਿਉਂਕਿ ਉਹ ਆਮ ਪਿੰਡਾਂ 'ਚ ਵੀ ਉਗਦੀਆਂ ਉਹ ਅਲੱਗ ਸੀਗੀਆਂ ਮਾਇਆ ਦਾ ਗਿਆਨ ਨਾ ਹੋਣ ਕਰਕੇ ਜਾਨ ਗਵਾ ਗਏ ਬਿਲਕੁਲ ਉਹ ਪਤਾ ਨਹੀਂ ਸੀ ਕਿ ਉਹਨੇ ਜੜ ਹਾਂਜੀ ਦੂਜੇ ਭਾਈ ਲੱਗੇ ਪਛਤਾਣੇ ਜਮਦਰ ਬੰਦੇ ਆਵਣ ਜਾਣੇ ਦੂਜੇ ਭਾਈ ਜਿਹੜੇ ਮਾਇਆ ਦੇ ਵਿੱਚ ਲੱਗੇ ਨੇ ਨਾ ਕੇਵਲ ਮਾਇਆ ਲੱਗੇ ਨੇ ਉਹ ਕਹਿੰਦੇ ਭੰਕੋਣਗੇ ਪਛਤਾਈ ਇਹਨੇ ਅਜੇ ਤੱਕ ਜਿੰਨੇ ਲੱਗੇ ਰਹੇ ਨੇ ਇਹਨਾਂ ਦੇ ਅੰਦਰ ਮਾਇਆ ਦੀ ਉਹ ਭੁੱਖ ਰਹੀ ਆ ਪਛਤਾਈ ਨੇ ਅਜੇ ਤੱਕ ਪਛਤਾਉਣਾ ਨਹੀਂ ਕੋਊਗਾ ਜਮਨਰ ਆਵਣ ਜਾਣੇ ਜਮਦੇ ਯਾਰ ਚ ਬੰਦੇ ਰਹਿਣਗੇ ਉਹਨਾਂ ਦਾ ਜਮਨਾ ਮਨ ਬਣਿਆ ਰਹੂਗਾ ਉਹ ਨਹੀਂ ਛੁੱਟਣਗੇ ਹਾਂ ਜੀ ਕਿਆ ਲੈ ਆਵੇਂ ਕਿਆ ਲੈ ਜਾਹੇ ਸਿਰ ਜਮਕਾਲ ਸੇ ਛੋਟਾ ਖਾਂਹ ਕਹਿੰਦੇ ਲੈ ਕੇ ਤਾਂ ਆਏ ਨਹੀਂ ਤੇ ਕੀ ਲੈ ਜਾਣਗੇ ਉਹ ਮਾਇਆ ਨਾਲ ਜਿਹੜੇ ਦਾ ਤਾਂ ਵੀ ਨਹੀਂ ਜਾਣਾ ਇੱਥੇ ਜਿਨੀ ਵਰਜੀ ਇਕੱਠੀ ਕਰਨੋ ਨਾ ਮਾਇਆ ਲੈ ਕੇ ਆਏ ਕੋਈ ਨਾ ਲੈ ਕੇ ਜਾ ਇਹ ਕਿਤੇ ਜਿਹੜੇ ਕਹਿਣ ਦਾ ਮਤਲਬ ਇਹ ਲੈ ਆਇਆ ਕੱਲ੍ਹ ਆਇਆ ਜਾਵੇ ਸਿਰ ਜਮਕਾਲ ਆ ਜਾਨ ਤਾ ਸਿਰਤੇ ਹੈ ਉਹ ਚੋੜ ਦਾ ਪੈੜੀਓ ਪੈੜੀ ਹੈ ਫਰੀਦ ਤੇ ਸ਼ਬਦ ਨਾ ਛੂਟੇ ਕੋਏ ਮੁਕਤ ਨਾ ਹੋਏ ਜਿਹੜਾ ਜਮਨ ਮਨ ਦਾ ਗੇੜ ਹੈ ਇਹਦੇ ਚੋ ਗੁਰੂ ਦੇ ਉਪਦੇਸ਼ ਬਿਨਾ ਗੁਰਬਾਣੀ ਦੀ ਸੋਚੀ ਬਿਨਾ ਗੁਰਬਾਣੀ ਨੂੰ ਮੰਨੇ ਬਿਨਾ ਖੋਜੇ ਬਿਨਾ ਗੁਰਬਾਣੀ ਦੇ ਅਨਸਾਰ ਚੱਲੇ ਬਿਨਾ ਜੀ ਚ ਰਹੇ ਬਿਨਾ ਛਡਕਾਰਾ ਨਹੀਂ ਹੋਣਾ ਜਮਨ ਮਨ ਦਾ ਇਹ ਨਹੀਂ ਕਟਿਆ ਨਹੀਂ ਜਾ ਰਿਹਾ ਹੋਰ ਜਾਂ ਠੀਕ ਹੈ ਜੀ ਪਖੰਡ ਹੋਏ ਪਖੰਡ ਜਿਹੜਾ ਕਰਦੇ ਨੇ ਪਖੰਡੇ ਕਰਦੇ ਨੇ ਜਿਹੜੇ ਗੁਰਬਾਣੀ ਤੋਂ ਖੰਡੇ ਹੈ ਉਹ ਇਸੇ ਇਦਾਂ ਮੁਕਤ ਨਹੀਂ ਹੁੰਦੀ ਪਖੰਡ ਜਿਹੜਾ ਜਿੰਨਾ ਕਿ ਮਨ ਦੇ ਵਿੱਚ ਦੁਆਤ ਹੈ ਨਾ ਲੋਕਾਂ ਨੇ ਵੀ ਤਾਂ ਹੋਣੇ ਕਰਦੇ ਨਾ ਇੱਕ ਬੰਦੇ ਕਿਚਿਤ ਦਿੰਦੇ ਸਾਰਿਆਂ ਚ ਦੇ ਬਾਰੇ ਜਿਹੜੋ ਦਾ ਆਪਣੇ ਤੇ ਪਈ ਹੋਈ ਹੋਈ ਆ ਇੱਕ ਬੰਦੇ ਕਿਚਿਤ ਹੋਣੇ ਨਹੀਂ ਦਿੰਦਾ ਮਾਇਆ ਐਸਾ ਕਰਦਾ ਮਾਇਆ ਤੋਂ ਛੁੱਟੇ ਨਾ ਸਕੇ ਉਤਨੀ ਸਿਮਰਤੀ ਘੜੀ ਆ ਬੇਤੀ ਪੁੱਤਰੀ ਸਿਮਰਤੀ ਸੰਕਰ ਜੇਵੜੀ ਲਾਇਆ ਹੈ ਬਾਟ ਪਾੜੀ ਆ ਇੱਥੇ ਦੂਸਰੀ ਪੌੜੀ ਦੀ ਸਮਾਸਤੀ ਹਾਂ ਜੀ